आथ कंश बधु कान जीव पह आवत भई सुइया राजता दुख मान मनाय तज धामन को हर जीव पह आई आए कह सो घि ज्ञात भई हर पह दुख की सब बात सुनाई डार दयो सिर ऊपर को पट पै तहि भीतर छार मिलाई कंठ लगाए रही परता हर जीव ते देखत ग्रीव निवाई रिप कर्म करे तब ही हर जीव फिर कह सो ਤਾਤ ਨਮਾਤ माद पए बस मोके पुत्र दहून को शीश नवाए ब्रह्म ਤਿਨ तिन को करकै हरजी तिन के मन मोह बढाए कह बिनती अदपाथ के भाव कह बंधन पायन ते छुटवाए इत श्री दशम स्कंधे पुराणे विचित्र नाटक ग्रंथे कृष्णा अवतारे कंस के कर्मकार तात मात को छरावद पए अथ काणजू आनंद सो ਜਲਿਆਏ ਕੈ ਸੋ ਫਿਰ ਅਨੰਦ ਕੀ ਤਾਉ ਕਿਦੋ 300 ਬਿੰਤੀ ਅਤ ਕੀਨੀ ਹਉ ਬਸਦੇ ਵਹ ਕੋ ਸੁਤ ਹੋ ਇਹ ਬਾਤ ਕਹਯੋ ਤਿਨ ਮਾਨ ਕੈ ਲੀਨੀ ਜਹੋ ਕਹੋ ਤੁਮ ਧਾਮਨ ਕੋ ਬਤਿਆ ਸੁਨ ਮੋਹ ਪ੍ਰਜਾ ਬ੍ਰਿਜ ਭੀਨੀ ਅਨੰਦ ਕਹੋ ਸੋ ਬਿਨ ਕਾਨ ਭਈ ਸੋ ਪੁਰੀ ਸਭ ਹੀਨੀ ਥੀਸ ਚੁਕਾਏ ਗਇਓ ਬ੍ਰਿਧ ਕੋ ਅਤ ਹੀ ਮਨ ਭੀਤਰ ਸੋਗ ਭਇਓ ਹੈ ਜਿਉਂ ਕੋ ਤਾਤ ਮਰੇ ਪਛਤਾਤੈ ਪਿਆਰੋ ਕੋ ਮਨੋ ਪ੍ਰਾਤ ਥੈਓ ਹੈ ਪੈ ਜਿਮ ਰਾਜ ਬਡੇ ਰਿਪਰਾਜ ਕੀ ਪੈਰਨ ਮੈਂ ਪਦ ਖੋਏ ਗਇਓ ਹੈ ਜੋ ਉਪਜੀ ਉਪਮਾ ਬਸਦੇ ਠਗ ਸਿਆਮ ਮਨੋਂ ਤਨ ਲੂਟ ਲਿਓ ਹੈ ਨੰਦ ਬਾਜਪੁਰ ਜਨ ਸੰਦੋਹਰਾ नांदाए बृजपुर बिखए कहि कृष्ण की बात सुनत सो कीनो सवै रोदन कीनो मात जसदा बाश्वैया बचियो जिन तात बढे अहते जिनहु बगबीर बलि हन दैया जाहे मरयो अगनाम महारिप पै पियरवा मुसली धरपैया जो तपस्या करकै प्रबते कब श्याम कहै पर पाइन लइया ਸੋ ਪੁਰ ਬਾਸਨ ਛੀਨ ਲਇਓ ਹਮ ਤੇ ਸੁਣੀਏ ਸਖੀ ਪੂਤ ਕਨਈਆ ਸਭ ਗੁਵਾਰਨੀਆਂ ਮਿਲ ਲਾਭ ਸੁਈਆ ਸੁਨ ਕੈ ਇਹ ਬਾਸ ਸਭੈ ਮਿਲ ਗੁਵਾਰਨ ਪੈ ਮਿਲ ਕੈ ਤਿਨ ਸੋਖ ਸੋ ਆਨੰਦ ਦੂਰ ਕਰਿਓ ਮਨ ਦੇ ਹਰ ਧਿਆਨ ਵਿਖੈ ਤਿਨੂ ਮਨ ਦੀਨੋ ਧਰਨੀ ਪਰ ਸੋ ਮੁਰਝਾਏ ਗਰੀ ਸੋ ਪਰਿਓ ਤਿਨ ਕੇ ਤਨ ਤੇ ਸੋ ਹਾ ਹਕ ਲੈਨ ਲਗੀ ਸਭ ਹੀ ਸੋ ਭਯੋ ਸੁਖ ਤੇ ਤਿਨ ਕੋ ਤਨ ਹੀ ਨੋ ਸੋਈਆ ਆਥਿਆ ਤੁਰ ਵੈ ਹਰ ਪ੍ਰੀਤੈ ਸੋ ਕਬ ਸ਼ਾਮ ਕਹੈ ਹਰ ਕੇ ਗੁਣ ਗਾਵੈ ਸੁਧ ਮਲਾਰ ਬਿਲਾਵਲ ਸਾ ਰੰਗ ਭੀਤਰ ਤਾਨ ਬਸਾਵੈ ਧਿਆਨ ਤਰੈ ਤਿਹ ਤੇ ਜੀ ਮੈ ਤਿਹ ਧਿਆਨ ਹਤੇ ਅਤ ਹੀ ਦੁਖ ਪਾਵੈ ਜੋ ਮੁਰਝਾਵਤ ਹੈ ਮੁਗਤਾ ਸਾਸੀ ਜਿਉਂ ਪਿਖ ਕੰਜ ਮਨੋ ਮੁਰਝਾਵੈ ਔਰ ਬਾਸਨ ਸੰਗ ਰਚੇ ਹਰ ਜੂ ਹਮ ਹੂ ਮਨ ਤੇ ਜਦ ਰਾਏ ਵਿਸਾਰੀ ਤਿਆਗ ਗਏ ਹਮ ਕੋ ਇਹ othor ਹਮੂ ਪਰਤੇ ਅਤ ਪ੍ਰੀਤ ਸੋਟਾਰੀ ਪੈ ਕਹਿ ਕੈ ਨ ਕਛੂ ਪਠਿਓ ਤਿਹ ਤ੍ਰੀਯਨ ਕੇ ਬਸ ਭੇ ਗਿਰਧਾਰੀ ਏਕ ਗਰੀ ਕਹਉ ਐਸੇ ਤਰਾ ਇਕ ਕੂਕਦ ਹੈ ਸੋ ਹahari ਹahari ਸਵਈਆ ਇਹ ਪਾਂਸੂ ਕਾਰਨ ਬੋਲਤ ਹੈ ਆਪਣੇ ਜੀਵ ਮੈਂ ਆਤਮਾਨ ਉਦਾਸੀ ਸੋਕ ਬਢਿਓ ਤਨ ਕੇ ਜੀ ਮੈਂ ਹਰ ਢਾਰ ਗਏ ਖਿਤ ਕੀ ਤੈਨੁ ਪਾਸੀ ਔਰ ਇਸ ਮਾਨ ਕਹੈ ਮੁਖ ਤੇ ਜਦ ਰਾਏ ਨ ਮਾਨਤ ਲੋਗਨ ਹਾਸੀ ਤਿਆਗ ਹਮੈ ਸੋ ਗੈ ਬ੍ਰਿਜ ਮੈ ਪੁਰ ਬਾਸਨ ਸੰਗ ਫਸੇ ਬ੍ਰਿਜ ਬਾਸੀ ਸੋਇਆ ਰੋदन ਕੈ ਸਭ ਗੁਆਰਨੀਆਂ ਮਿਲ ਐਸੀ ਕਹਿਓ ਅਤੀ ਹੋਏ ਵਿਚਾਰੀ ਤਿਆਗ ਬ੍ਰਿਜੈ ਮਥਰਾ ਮਿੰ ਗਏ ਤਜ ਨੇਹ ਅਨੇਹ ਕੀ ਬਾਤ ਵਿਚਾਰੀ ਇਕ ਗਿਰੈ ਤਰਿ ਯਉ ਕਹਿ ਕੈ ਇਕ ਐਸੇ ਸੰਭਾਰ ਕਹੈ ਬ੍ਰਿਜਨਾਰੀ ਰੀ ਸਜਣੀ ਸੁਨੀਐ ਪਤਿਆਂ ਬ੍ਰਿਜਨਾਰ ਸਵੈ ਬ੍ਰਿਜਨਾਥ ਵਿਸਾਰੀ